ਮੰਡੀ ਵਿੱਚ ਵੀ ਨਾਮੀਆਂ ਗੋਰੀਆਂ ਨੇ ਮੱਦੀ ਵਿੱਚ ਮੁਖੇ ਨਾਮੀਆਂ ਨੇ ਉਹ ਜੀ ਮੁੰਡੀ ਵਿੱਚ ਤੇਵੇਂ Uh oh ਉਦਕੇ ਗੁਰਖਾਰ ਸਾਹੀ ਮੇਰਾ ਗੁਰਾਨੂ ਉਦਕੇ ਗੁਰਖਾਰ ਸਾਹੀ ਉਸਤਾਨ ਆਪੀ ਹੋ ਬਰਿਹਾਰ ਵਿੱਚ ਕੋਈ ਨਾ ਉਪ ਵੀ ਹੋ ਬਰਿਹਾਰ ਵਿੱਚ ਹੰਨੀ ਉੱਤ ਆਪੀ ਸਿੰਘ ਜੀ ਕਹਿੰਦੇ ਨੇ ਉਹ ਜਲੇ ਬਿਗਲੀ ਦਾ ਸੰਗ ਪਠਾਨਾ ਇੱਕ ਮੋਗਲ ਦੋ ਕੋੜੇ ਲੈ ਘਰ ਮੈਂ ਆਵਾ ਅੱਜ ਮੀਰ ਨਾਮੀ ਪਠਾਨ ਦੋ ਕੋੜੇ ਬੜੇ ਕੀਮਤ ਹੁਣ ਕਿਸੇ ਦੀ ਹਿੰਮਤ ਸੀ ਕਿ ਉਹ ਉੱਤ ਚੜ ਕੇ ਬੋਲੀ ਦੇਵੇ ਹਜ਼ੂਰ ਨੂੰ ਬਾਹ ਫੜ ਕੇ ਬਰਦਾ ਬਣਾ ਕੇ ਘਰ ਲੈ ਆਂਦਾ ਹਜ਼ੂਰ ਨੇ ਆਪਣੇ ਸ੍ਰੀ ਬਾਣੀ ਚ ਦੱਸਿਆ ਹੈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਪਾਗਾ गुरकी पत्नी हाट बकाना जित लाया ते त लागा अजमेर ने बहुत सारी कीमत देके इबरदा खरीदिया सी कहन लगा मैं इनु किसी शौखे जतनों ते दे ला देवा घर वाली पतराणी रा सलाह दी ती ओ कहंदी ऐस नु गागर दे दे ते पानी भरया कर हजूर भी फरमांदे ने पीये ते पानी खाए ता फिर जाई ऐ मैं तेरे वास्ते पानी ले आवां हजूर ਗਾਗਰ ਚਗਾ ਦਿੱਤੀ ਹੈ ਇਹ ਜਲ ਲੈਣ ਵਾਸਤੇ ਨਰਨਕਾਰੀ ਚੱਲ ਪਈ ਹੈ ਹਜ਼ੂਰ ਨੇ ਇਤਿਹਾਸ ਦੱਸਦਾ ਸੁਕਾਇਆ ਇੱਕ ਵਾਰ ਜਦ ਮਰਦਾਨੇ ਤੇ ਉਹਨੂੰ ਦਿੱਤਾ ਨਹੀਂ ਉੱਥੇ ਤੇ ਪਹਿਲੀ ਵਾਰ ਗੋਖਦੇ ਚਿੱਲੇ ਤੇ ਉਹਨਾ ਵੀ ਹਜ਼ੂਰ ਨੂੰ ਜਲ ਲੈਣ ਵਾਸਤੇ ਤੇ ਗਿਆ ਸੀ ਤੇ ਰਸਤੇ ਦੇ ਵਿੱਚ ਬਹੁਤ ਸਾਰੀ ਮਾਇਆ ਖਿਲਾਰ ਦਿੱਤੀ ਉੱਥੇ ਵੀ ਪਾਣੀ ਸੁਕਾਇਆ ਜੂਰ ਨੇ ਇਤੀਸਰਾ ਵਕਤ ਹੈ ਅਗੇ ਜੂਰ ਲੈ ਕੇ ਗਾਂਦਰ ਚੱਲ ਪੈਣਾ ਅਸਾ ਚੋਦ ਵਰਤਾਇਆ ਤੇ ਘਰਾਂ ਦਾ ਪਰਿਆ ਪਾਣੀ ਵੀ ਬਚਾ ਦਿੱਤਾ ਖੂਹ ਵੀ ਸੁੱਕ ਗਏ ਨੇ Here we go. ਰਾਤਾਂਾਂ ਚਲੇ ਨਾ ਕਰ ਲੈ ਨਿਕਲੇ ਗਾਰ ਵੀਰੇ ਤੁਮਾਨ ਤੁਸੀ ਹੈ ਅਦੂਰ ਨੇ ਸਾਰੇ ਸ਼ਹਿਰ ਦਾ ਪਾਣੀ ਸੁਕਾ ਦਿੱਤਾ ਹੈ ਘਰਾਂ ਦਾ ਪਰਿਆਆ ਪਾਣੀ ਵੀ ਸੁੱਕ ਗਿਆ ਹੈ ਪਾਈਪਾਂ ਦਾ ਉਸਣ ਦੀ ਦਾਸ ਤੇ ਨੇਸਾਂ ਕਹਿੰਦੇ ਨੇ ਯੋਰ yee yeah. ਮੁਖਮਲ ਨੂੰ ਉਪਜੋ ਅਕੀਸਾ ਸਾਹ ਮੁਖਮਲ ਨੂੰ ਉਪਜੋ ਅਪਿਰਾ ਸਾਹ ਦੇਸਵੀ ਜੱਲ ਜੀ ਮਨ ਆਸਾ ਬੜੀ ਦੇਸ ਮੈਂ ਇਲਤਫਾਲਾ ਇਹ ਕਾਮਾ ਸ੍ਰੀ ਗੁਰੂ ਰਹੇ ਖੁਸ਼ਾਲਾ ਹਜ਼ੂਰ ਨੇ ਆਣ ਕੇ ਕਿਹਾ ਮੀਰ ਓਕੂ ਦੇ ਪਾਣੀ ਕੋਈ ਨਹੀਂ ਫਿਰ میر راست نجا کے دوسرے محلے چلے ڈو تے حضور دا نلالا کت دنیا دیکھ رہی ہے جتے جو مندل ہوان ہوتے جتے جان تے ਤੇ ਸੁੰਦਰ ਮੁੱਖ ਤੇ ਪਖਦੀਆਂ ਲਾਲੀਆਂ ਨੇ ਇਹ ਕਿੰਦਰਾਮ ਦੇ ਲੋਕ ਘਹਰਾ ਨੂੰਂਦੇ ਤੇ ਸੁੰਦਰ ਮੁੱਖ ਤੇ ਪਖਦੀਆਂ ਲਾਲੀਆਂ कब <speaking> आउलालेया <in foreign language>